ਜੱਜ ਕਦੇ ਨਾ ਝੂਰ ਐ ਮੂੜੇ ਸਤਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਕੋੜ ਐ ਜੇ ਸਤਗੁਰ ਦਾ ਉਪਦੇਸ਼ ਸੁਣ ਲਵੇ ਤੈਨੂੰ ਝੂਰਦਾ ਹੀ ਨਹੀਂ ਫਿਰ ਉਹ ਦਾਨ ਕਨੇ ਕਹ ਤੂੰ ਝੂਰਦਾ ਏ ਝੂਰ ਉਹ ਕਹਨੇ ਝੂਰਦਾ ਤਾਂ ਐ ਸਤਗੁਰ ਦਾ ਉਪਦੇਸ਼ ਨਹੀਂ ਸੁਣਿਆ ਨੇ ਜੇ ਤੂੰ ਸਤਗੁਰ ਦਾ ਉਪਦੇਸ਼ ਸੁਣ ਲਵੇ ਫਿਰ ਤੂੰ ਝੂਰਦਾ ਹੀ ਨਹੀਂਗਾ ਹਾਂ ਸੋਹਣਾਂ ਨੇ ਕਹਾ ਉਹ ਤੋਂ ਕਹਿਤੀ ਗੱਲ ਉਰੰ ਦਾ ਕਾਰਨ ਸਤਗੁਰੂ ਦਾ ਉਪਦੇਸ਼ ਨਹੀਂ ਸੁਣਿਆ ਬੋਲ ਬਾਲੀ ਸੁਣੀ ਔਰ ਸਮਝੀ ਨਹੀਂ ਪੰਜ ਉਰੰ ਦਾ ਹਾਂਜੀ ਸਤਗੁਰੂ ਦਾ ਉਪਦੇਸ਼ ਸੁਣ ਤੋਂ ਵਿਖਾ ਵਿਖਾ ਕੀ ਹੁੰਦਾ ਹੈ ਮਤਲਬ ਸਭ ਕੁਝ ਸਮਝ ਆ ਜੂਗੀ ਦਿਖ ਜੂਗਾ ਤੈਨੂੰ ਇਹ ਕੀ ਹੈ ਕਿਉਂ ਦੱਟਾ ਕਿਉਂ ਨਹੀਂ ਦੱਤਾ ਤੈਨੂੰ ਤੈਨੂੰ ਇਹ ਨਹੀਂ ਸਮਝ ਆ ਆਪੇ ਵਿਖਾ ਦੇਣਾ ਦਿਖਾ ਦੇਣਾ ਜੇ ਹੁੰਦਾ ਨਾ ਉਹਦੀ ਸਿਰਫ ਚਲੇ ਆ ਅੱਛਾ ਜੀ ਤੈਨੂੰ ਦਿਖਾ ਰਿਹਾ ਸਭ ਕੁਝ ਵੀ ਕਿਉਂ ਦੱਤਾ ਉਹ ਤੈਨੂੰ ਕਿਉਂ ਨਹੀਂ ਦੱਤਾ ਤੇਰਾ ਨਾਮ ਤੇ ਹੋਰ ਜਿਆਦਾ ਦਿੱਤਾ ਇਹਦੇ ਵਿੱਚ ਕੋ ਉਹ ਦਿਖਾਇਆ ਤੈਨੂੰ ਦੱਸਦਾ ਦੱਸਦਾ ਵੀ ਹੋਰ ਜਿਆਦਾ ਉਹ ਤੇਰਾ ਉਹਦਾ ਉਹ ਨੂੰ ਉਹਨੇ ਕਹਿ ਦਿੱਤਾ ਤੈਨੂੰ ਤੇਰੇ ਲਾਈ ਉਹਨੇ ਸੰਤੋਖ 'ਚ ਰਹਿ ਗੁਰ ਨਹੀਂ ਕੋਈ ਨਗਰੇ ਕਾ ਹੈ ਨਾਉ ਬੁਰਾ ਸਤਗੁਰਾ ਉਹੀ ਗੁਰ ਬਾਕੀ ਦਾ ਨਗਰੇ ਕਾ ਹੈ ਨਾਉ ਬੁਰਾ ਜਿਹੜਾ ਜਿਹੜਾ ਉਹਦਾ ਤਾਂ ਗਿਆਨ ਜਿਹੜਾ ਗੁਰਾ ਹੈ ਉਹ ਤਾਂ ਫੁਰੀ ਦਿੰਦਾ ਪਤਾ ਨੂੰ ਕਰੇ ਹੋਰ ਨੇ ਸਿੱਖਿਆ ਦਿੱਤੀ ਜੀ ਦੀ ਹੋਰ ਦੀ ਸਿੱਖਿਆ ਉਹਨੇ ਤੇਰਾ ਸੁਖ ਭੰਗੀਤਾ ਹੋਇਆ ਹੈ। ਕਹੇ ਸਤਗੁਰੂ ਨੂੰ ਛੱਡ ਕੇ ਕੋਈ ਨਹੀਂ ਗੁਰ ਲਿਖਿਆ ਜੀ ਸਤਗੁਰ ਗੁਰ ਨਹੀਂ ਕੋਈ। ਹੋਰ ਗੁਰ ਜਿਹੜਾ ਬਣਾਉਣੇ ਗੁਰੂ ਬਣਾਉਣੇ ਉਹ ਗਲਤ ਹੈ। ਜਿਗੁਰਾ ਹੋ ਜਿਹੜਾ ਦੂਆ ਹੈ। ਜੀ ਤੂੰ ਗੱਲ ਸੁਣਨਾ ਉਹ ਆਪ ਵੀ ਲੋਰ ਹੈ। ਠੀਕ ਹੈ ਜੀ। ਵਨ ਬੋਗਨ ਲੋਰਾ ਹੁੰਦਾ ਛਾਕ ਦੇ ਲੋਰਾ ਹੁੰਦਾ ਪਰ ਗੁਰੂ ਬਣੇ ਹੋਏ ਆਪ ਜਿਹੜਾ ਆਪ ਗੁਰੂ ਬਣਿਆ ਅਸਲ ਵਿੱਚ ਲੋਰਾ ਹੈ ਉਹ ਦੇ ਰਿਹਾ ਬੁਰਾ ਕਰ ਰਿਹਾ ਤੇਰਾ ਪਰ ਇੱਕ ਨੇ ਹੈ ਉਹ ਕੁਛ ਇਸ ਤਰ੍ਹਾਂ ਦੇ ਬਚਨ ਕਰਦੇ ਆ ਜੀ ਦੂਸਰਿਆਂ ਦੇ ਖਿਲਾਫ ਵੀ ਆਹ ਬਾਈ ਪੰਕਤੀ ਵਰਤਦੇ ਆ ਸਤਿਗੁਰ ਬਾਝੋਂ ਗੁਰ ਨਾਹੀਂ ਕੋਈ ਨਿਗਰੇ ਕਾਹੇ ਨਾਉ ਬੁਰਾ ਅਕਾ ਗੁਰਬਾਣੀ ਨੂੰ ਮੰਨਦੇ ਨੇ ਆਪਣੇ ਅੰਦਰ ਵਾਲੇ ਨੂੰ ਅੰਦਰ ਨੂੰ ਲਿਖਾ ਦੇ ਉਹਨਾਂ ਨੂੰ ਗੁਰਬਾਨੀ ਸਮਝ ਆਇਆ ਪੌੜ ਨਾਲ ਦੀ ਗੁਰਬਾਨੀ ਸਮਝ ਆਉਣੀ ਥੱਲੇ ਵਿੱਚ ਪੌੜ ਲੱਤਾ ਇਹਨਾਂ ਨੇ ਅੱਲਾਹ ਨੂੰ ਬਣਾ ਲਿਆ ਪੌੜ ਤਾਂ ਉਹਨੂੰ ਦਿੱਤੀ ਸੀ ਜਿਹਨੂੰ ਗੁਰਬਾਨੀ ਦੀ ਪੂਰੀ ਸਮਝ ਆ ਚੁੱਕੀ ਸੀ ਉਹਨਾਂ ਜੋ ਦਾਖਲੇ ਵਿੱਚ ਪਰੌਣ ਦੇਣ ਦੇ ਨੂੰ ਪਹਿਲਾਂ ਹੀ ਯਾ ਇਹ ਆਪਣੇ ਲੋਹੇ ਜਿਹੜੇ ਪੌੜ ਦੇ ਵਾਲੇ ਨੇ ਉਹ ਜਿਹੇ ਗਾਂ ਪੌੜ ਲੈਣ ਦੇ ਨੇ ਉਹ ਤਾਂ ਗੱਲੇ ਕਹਿਦੇ ਨਹੀਂ ਕੋਈ ਸਹੀ ਨਹੀਂ ਜਿਹਨਾਂ ਪੌੜ ਦਿੱਤੀਆਂ ਪੰਜੇ ਪਾਸ ਸੀਗੇ ਪਹਿਲਾ ਇਨਸਾਨ ਨੇ ਪਾਸ ਹੋ ਗਏ ਤਾਂ ਪੌੜ ਦਿੱਤੀ ਇਹ ਜੀ ਤੋਂ ਬਸ ਕਿਹੜਾ ਇਮਾਨ ਲੈੰਦੇ ਨੇ ਇਹ ਲਾਲਚਿਤੰਦ ਨੇ ਵੀ ਕੌੜ ਲੈ ਲਓ ਇਹ ਇਹ ਪਾਰਡੀਆਂ ਇਹ ਵੋਟਾਂ ਦੀ ਮੋਹਰ ਹੈ ਉਹਨਾਂ ਜਿਹੜੇ ਤਰੀਕੇ ਨਾਲ ਧੜੇ ਬੰਦਿਆਂ ਨੇ ਸੰਤ ਆਪਣੀ ਕੋਲ ਲਈ ਜਾਂ ਕੋਈ ਕਹਿੰਦਾ ਮੈਂ ਪਿੰਡਾਲ ਦਾ ਛਕਿਆ ਕੋਈ ਕਹਿੰਦਾ ਮੈਂ ਨਾਮਦਾਰੀ ਦਾ ਛਕਿਆ ਕੋਈ ਕਹਿੰਦਾ ਮੈਂ ਐਜੀਪੀਸੀ ਦਾ ਛਕਿਆ ਕੋਈ ਕਹਿੰਦਾ ਮੈਂ ਨਗਾਉਂ ਛਕਿਆ ਧੜੇ ਨੇ ਮੰਡੀਆਂ ਪੈ ਗਈਆਂ ਜੀ ਮੰਡੀਆਂ ਦੇ ਔਰ ਉਹ ਜਿਨ੍ਹਾਂ ਨੂੰ ਜਦੋਂ ਤੁਹਾਨੂੰ ਪ੍ਰੇਰਣਾ ਦਿੰਦੇ ਦੀ ਫਿਰ ਆਹ ਵਾਲੀ ਟੁਕ ਵਰਤਦੇ ਆਂ ਸਤਗੁਰ ਗੁਰ ਨਹੀਂ ਕੋਈ ਸਤਗੁਰ ਦਾ ਨੂੰ ਪਤਾ ਵੀ ਜੇ ਜਾਣਿਆ ਸਤਗੁਰ ਦੱਸ ਕਾਨੂੰ ਉਹਨੂੰ ਪੁੱਛੋ ਤੁਸੀਂ ਇਹ ਕੌਣ ਹੈ ਸਤਨ ਦੇ ਕੋਈ ਨਹੀਂ ਕਿਸੇ ਨੇ ਸਤਗੁਰ ਤੇ ਜਾਦੇ ਕਿਸੇ ਨੇ ਨੇ ਉਹ ਤਾਂ ਪੁੱਤੀ ਸਾਹਿਬ ਨੂੰ ਸਤਿਗੁਰ ਕਹਿਣ ਲੱਗ ਜਾਨੇ ਉਸ ਸਮੇਂ ਵੀ ਇਹ ਹੈਗਾ ਜੀ ਇਹ ਗੁਰੂ ਵਾਲੇ ਵੀ ਤੁਸੀਂ ਬਣੇ ਤੁਸੀਂ ਨਗੁਰੇ ਤੁਸੀਂ ਫਿਰ ਕੌਣ ਲੋਕਾ ਹੋ ਗਏ ਦਿੱਤੀ ਹੈ ਪੌੜ ਦੇਣ ਦੀ ਫਿਰ ਨੇ ਅਥਾਰਟੀ ਜੇ ਉਹ ਆਦਮੀ ਇੰਨੀ ਕਪੈਸਿਟੀ ਨਹੀਂ ਰੱਖਦਾ ਤਾਂ ਪੌੜ ਨਹੀਂ ਦੇ ਸਕਦਾ ਠੀਕ ਹੈ ਉੱਠ ਕੇ ਥੋੜੀ ਪੌੜ ਦੇਣ ਲੱਗ ਜੂਗਾ ਇਹ ਤਾਂ ਮਜ਼ਾਕ ਬਣਾ ਲਿਆ ਕੌਣ ਮੇਰੇ ਨੂੰ ਮੈਨੂੰ ਪੁਰਾਣਾ ਫੌਜਦਾ ਸਿੰਘ ਮਿਲਿਆ ਉਹ ਕਹਿੰਦਾ ਕਿ ਸਿਰਫ ਸਵਈਆਂ ਦਾ ਪਾਠ ਮੰਨੂ ਆਉਂਦਾ ਸੀ ਹਾਂ ਉਹ ਕਾਂਠ ਸੀ ਉਹ ਕਹਿੰਦਾ ਮੈਨੂੰ ਪੰਜ ਪਿਆਰੇ ਚੋਂ ਲੈ ਲੈਂਦੇ ਸੀ ਪਾਠ ਕਾਂਠ ਨਹੀਂ ਸੀ ਇਹਨਾਂ ਨੇ ਆ ਜਾਂਦੇ ਤੇ ਫੋੜ ਲਈ ਜਾਂਦੇ ਨੇ ਠੀਕ ਹੈ ਜੀ ਉਹ ਤਾਂ ਹੀ ਫਿਰ ਅੱਜ ਕੱਲ ਉਂਗਲੀ ਉੱਠਦੀ ਹੈ ਜੀ ਉਹ ਤਾਂ ਉੱਥੂ ਜਦੋਂ ਦੇਖੋ ਨਾ ਅਸੀਂ ਉਹਨੂੰ ਬਣਾ ਲਿਆ ਅਗੇ ਵੱਡੇ ਨਾਲ ਦੇ ਵਿੱਚ ਤਿੰਨ ਤਿੰਨ ਸਾਲ ਪੌੜੀ ਦੇੰਦੇ ਆ ਜਾਂਦੇ ਸੀ ਰਹਿੰਦੇ ਸੀ ਉਹ ਕਹਿੰਦੇ ਕੋਈ ਨਹੀਂ ਦਵਾਂਗੇ ਹਾਲੇ ਕੋਈ ਨਧੂ ਰੋਟੀ ਕਰਦਾ ਹਾਲੇ ਬਾਣ ਪਾਲਾ ਕਿਸ਼ਾਰਾ ਪਾਲਾ ਕੋਈ ਨਹੀਂ ਦਰਪਾਨ ਪਾਲਾ ਕੋਈ ਗੱਲ ਨਹੀਂ ਨਾਲ ਹੈ ਤਿੰਨ ਤਿੰਨ ਸਾਲ ਪੌੜੀ ਨਹੀਂ ਦਿੰਦੇ ਪੱਕਾ ਪੱਕਾ ਦੇਖ ਲੈਂਦੇ ਸੀ ਤੈਨੂੰ ਉਹ ਚਲ ਨਾਲ ਹੈ ਪਹਿਲ ਤਿੰਨ ਸਾਲ ਤੇ ਦੇਖਾਂਗੇ ਤੇ ਹੁਣ ਕਹਿੰਦੀ ਹੈ ਬੇਟੀ ਤੈਨੂੰ 300 ਦੇ ਦੋ ਪੌੜਾ ਲੈ ਲਵੇ ਜੇ ਜਾਂਦਾ ਹੀ ਰਾਜੇ ਰਾਜ ਦੇ ਸਭ ਕੁਝ ਸਤਿਗੁਰ ਕਹਿੰਦਾ ਨਾ ਸੱਚ ਦਾ ਗਿਆਨ ਕਰਾ ਸਕਦਾ ਹੈ ਸੱਚ ਨਾਲ ਜੋੜ ਸਕਦਾ ਹੈ ਸੱਚ ਨਾਲ ਜੁੜਿਆ ਹੋਇਆ ਆਪ ਹੈ ਉਸ ਕੇ ਸੱਚ ਸਭਨਾ ਦਾ ਖਸਮ ਨਾਲ ਜੋੜ ਸਕਦਾ ਤੂੰ ਕਾਹ ਕਿ ਦੂਜੇ ਲੱਗੇ ਜਿਹੜੇ ਗੁਰੂ ਤਾਂ ਬਣੇ ਫਿਰਦੇ ਨੇ ਖਸਮ ਨਾਲ ਜੁੜੇ ਹੋਰ ਛੋੜ ਦੂਜੇ ਲੱਗੇ ਡੁੱਬੇ ਸਿਪੜ ਜਾ ਰਹੇ ਤਾਰੇ ਜਾ ਰਹੇ ਨੇ ਉੱਪਰ ਦੀ ਬੀਲੀ ਦੀ ਖੱਬੇ ਜਾਰੇ ਜਾਂ ਜੇ ਖੱਬੇ ਦੇ ਨਾਲ ਰੋਟੀ ਦੀ ਤਾਰ ਬੰਨ੍ਹ ਦੀਏ ਤਾਰਾਂ ਨਾਲ ਨਾ ਜੋੜੀਏ ਮੋਟਰ ਚੱਲ ਜੂਗੀ ਦੇਖ ਲੈ ਦੇ ਬਸ ਬੇ ਕਰਾਵਾ ਖੱਬੇ ਜਦੀ ਤਾਰਾਂ ਚ ਸਤਪੁਖ ਉਹ ਜਿਹੜਾ ਸਰੀਰ ਉਹਦਾ ਖੱਬਾ ਹੀ ਆ 90 ਦਾ ਤਾਰਾ ਜੋੜ ਦੇ। ਉਹ ਕਰਾਵਾਂ ਦਾ ਖੰਭੇ ਹੀ ਕਰੂਆ ਕਰਾਵਾਂ ਦਾ ਤਾਰਾ ਜੈ। ਉਹ ਤਾਰਾ ਕਿੱਥੇ ਜੁੜੀਆਂ ਹੋਈਆਂ ਨੇ? ਜੇ ਉਹ ਤਾਰਾ ਬਣਾ ਕਹਿੰਦੇ ਜੁੜੀਆਂ ਹੁਣ ਕਰਾਵਾਂ ਦੋਨੇ ਚ ਵੀ ਕੋਈ ਨਹੀਂ। ਉਹ ਪਾਵਰ ਹਾਊਸ ਨਾਲ ਜੁੜੀਆਂ ਹੋਈਆਂ ਨੇ। ਉਧਰ ਚ ਪਾਵਰ ਹਾਊਸ ਨਾਲ ਜੋੜ ਦੀ ਰਸ। ਕਰਾਵਾਂ ਤਾਰਾ ਜਬ ਨਹੀਂ ਹੈ। ਸਰੀਰ ਖੰਭਾ ਬੁੱਧੀ ਸੁਰਤੋਂ ਉਤਾਰ ਹੈ ਜਿਹੜੀ ਸੁਰਤ ਸ਼ਬਦ ਨਾਲ ਜੁੜੀ ਹੈ ਨਾ ਸੁਰਤ ਉਤਾਰ ਹੈ ਖੱਪਾ ਸ਼ਰੀਰ ਹੁਣ ਤੁਸੀਂ ਖੱਪਾ ਦੇ ਖੱਪਾ ਦਾ ਸ਼ਰੀਰ ਹੈ ਨਾਮ ਕਦਾ ਸ਼ਰੀਰ ਖੱਪਾ ਸਾਡੇ ਗੁਰੂ ਦਾ ਸ਼ਰੀਰ ਖੱਪਾ ਤੁਸੀਂ ਖੁੱਪੇ ਨਾਲੇ ਤਾਰਾ ਜੁੜੀ ਹੈ ਨਾ ਖੱਪੇ ਜੁੜੇ ਤੇ ਬਿਜਲੀ ਆਉਂਦੀ ਹੁੰਦੀ ਰੋਸ਼ਨੀ ਆਉਂਦੀ ਹੁੰਦੀ ਕੋਈ ਜੌਨਰਾਂ ਮੈਂ ਬ੍ਰੇਕ ਮਿਲ ਗਿਆ ਬਿਜਲੀ ਤਾਰਾਂ ਜੋੜੀਏ ਜੇ ਉੱਥੇ ਤਾਰਾਂ ਨੂੰ ਜੋੜਨਗੇ ਤਾਂ ਫਿਰ ਬੀਟਰ ਚੱਲਦਾ ਹੈ ਤੇ ਪੈਸੇ ਜਣੇ ਪੈਂਦੇ ਨੇ। ਖੁੱਪੇ ਰਿਹਾ ਜੋੜੇ ਤੇ ਕੋਈ ਪੁੱਛਦਾ ਨਹੀਂ। ਉਹ ਤਾਰ ਜੁੜਦੀ ਹੈ ਉਝੋੜਦੀ ਹੈ ਪਾਵਰ ਹਾਊਸ ਨੂੰ ਜਾ ਕੇ। ਸੁਰਤੇ ਛਾਪਨਾਂ ਜੁੜੀ ਹੋਈ ਹੈ ਪਾਵਰ ਹਾਊਸ ਨੂੰ ਜੁੜੀ ਹੋਈ ਹੈ। ਤਾਂ ਕਹੇ ਜਾ ਕੇ ਉਹ ਬਿਜਲੀਏ ਬਾੜੀ ਵਿਚਾਰ ਲਗੀਤੀ ਹੈ। ਇਹਦੇ ਨਾਲ ਜੇ ਨਜ਼ਰ ਤਾਰ ਸਾਡੀ ਜੁੜਦੀ ਨੀ ਸੁਰਤ ਜੁੜਦੀ ਨੀ ਸ਼ਬਦ ਨਾਲ ਵਿਚਾਰ ਨਹੀਂ ਕਰਦੇ ਤਾਂ ਰੋਸ਼ਨੀ ਹੋਣੀ ਕਿਤੇ ਜੇ ਮੀਟਰ ਤਾਂ ਥੱਲੇ ਵੀ ਸਾਡੀਆਂ ਤਾਰਾਂ ਚ ਵੀ ਡਿਫੈਕਟ ਪੈ ਜਾਏ ਲਾਈਟ ਤਾਂ ਵੀ ਚਲਦੀ ਫਿਰ ਉਹ ਦੇਖਦੇ ਨੇ ਵੀ ਸੋਚੀਂ ਕਿ ਰੁਕਸਾ ਕਿੱਥੇ ਰੁਕਸਾ ਬਿਜਲੀ ਦਾ ਹੈਗੀ ਹੈ ਜਲਦਾ ਕਿਉਂ ਨਹੀਂ ਗੁਰਬਾਣੀ ਦਾ ਸਾਡੇ ਕੋਲ ਹੈ ਰੋਸ਼ਨੀ ਹੁੰਦੀ ਕਿਉਂ ਨਹੀਂ ਅੰਦਰ ਸਾਡੇ ਅੰਦਰ ਰੋਸ਼ਨੀ ਕਿਉਂ ਨਹੀਂ ਹੁੰਦੀ ਗੁਰਬਾਣੀ ਸਾਡੇ ਕੋਲ ਹੈ ਤਾਰਾ ਦਾ ਫੀਲ ਨਹੀਂ ਲੱਗਦਾ ਹੈ ਜੀ ਸਾਡੇ ਦੀ ਗੱਲ ਹੈ ਕਿਥੇ ਡਿਫੈਕਟ ਹੈ ਉਹ ਡਿਫੈਕਟ ਦੇਖ ਰਹੇ ਆਪਕਿਥੇ ਸਾਡੇ ਘਰ ਦੀ ਉਹ ਰੋਸ਼ਨੀ ਚਲੀ ਗਈ ਕਿਉਂ ਚਲੀ ਗਈ ਉਹ ਡਿਫੈਕਟ ਦੇਖ ਰਹੇ ਆ ਕਿਥੇ ਡਿਫੈਕਟ ਮੀਟਰ ਚ ਡਿਫੈਕਟ ਮੀਟਰ ਚ ਹੈ ਮੀਟਰ ਦੀ ਜੇ ਘਰਾਂ ਸਪਲਾਈ ਕਰਦਾ ਜਾਵੇ ਕਿਥੋਂ ਅੰਡਰਾ ਉੱਥੇ ਵੀਟਰ ਹੈ ਜਿਹੜੇ ਉੱਪਰ ਬੈਠੇ ਨੇ ਨਾ ਉਹਨਾਂ ਨੇ ਕਰਤੀ ਉਸ ਤੋਂ ਤੇ ਪਿੱਛੋਂ ਹੀ ਘੱਟਤੀ ਲੈਣ ਹੋਰ ਗਹਿੇ ਪਾਸੇ ਜੋੜਦਾ ਸੁਬਾਰਾ ਜੋੜਦਾ ਵੀਟਰ ਤਾਂ ਹੀ ਹੁਣੇ ਦਿੰਦਾ ਵੀਟਰ ਦਾ ਵੀਟਰ ਨਹੀਂ ਦਿੰਦਾ ਵੀਵਾਣੀ ਦਾ ਕਾਉਂਟ ਨਹੀਂ ਦਿੰਦਾ ਨਾ ਨਾ ਸਾਰੇ ਉੱਤੇ ਜਾਂਦੀ ਹੈ ਉਹਨਾਂ ਨੇ ਖੱਬੇ ਨਾਲ ਜੋੜਿਆ ਹੋਇਆ ਆਪਣੀ ਅਲੇ ਨਾਲ ਵੀਰ ਨਾਲੀ ਲੈਣ ਨੂੰ ਉਹਦੇ ਨਾਲ ਕੱਟ ਕੇ ਨਾ ਉਦਲੇ ਨਾਲ ਨਾਲ ਖੱਬੇ ਨਾਲ ਜੋੜਦਾ ਨਾਲ ਦੇ ਸਰੀਰ ਨਾਲ ਨਾਲ ਦੇ ਸਰੀਰ ਨਾਲ ਜੋੜਦਾ ਖੱਬੇ ਨਾਲ ਨਾਲ ਜੋੜ ਲਿਓ ਲੈਟ ਆਵੇ ਕਿਥੋਂ ਉੱਥੇ ਜੋੜਨ ਤੇ ਬਿੱਲ ਆਉਂਦਾ ਉੱਥੇ ਜੋੜਨ ਤੇ ਬਿੱਲ ਆਉਂਦਾ ਹਰ ਵਾਰ ਤਾਂ ਦੇਣਾ ਪੈਂਦਾ ਨਾ ਉੱਥੇ ਵੀ ਫੀਸ ਲੱਗਦੀ ਹੈ ਉੱਥੇ ਫੀਸ ਲੱਗਦੀ ਹੈ ਇਤੋਂ ਕੋਈ ਪ੍ਰਾਪਤੀ ਹੁੰਦੀ ਹੈ ਉੱਥੇ ਫੀਸ ਲੱਗਦੀ ਹੈ ਨਾ ਇੱਥੇ ਮੇਰਾ ਕਿਸ ਨਾਮ ਦਾ ਹੈ ਪਰ ਤਾਂ ਮਾਂ ਵੇਚਣਾ ਪੈਂਦਾ ਹੁਕਮ ਮੰਨਣਾ ਪੈਂਦਾ ਉੱਥੇ ਲੱਗਦੀ ਹੈ ਫੀਸ ਇੱਥੇ ਲੱਗਦਾ ਕੁਝ ਨਹੀਂ ਇੱਥੇ ਮਿਲਦਾ ਹੀ ਮਿਲਦਾ ਤਾ ਖੰਬੇ ਨਾਲ ਜੋੜਤੀ ਹੈ ਤਾਰਾ ਫਿਰ ਆਪਣੇ ਨਾਲ ਜੋੜਦੇ ਹੁਣ ਜੇ ਜੇ ਨਾਲ ਨੇ ਸਿੱਧਾ ਜੋੜਨਗੇ ਤਾਂ ਹੀ ਆਪਣੇ ਨਾਲ ਜੋੜਨਗੇ ਆਪ ਕਿਸੇ ਬਣਦੇ ਨੇ ਸਾਰਾ ਹਿੰਦੂਵਤ ਬਣਾ ਲਿਆ ਬਹੁਤ ਕਿਲਾਕੀ बहुत ਬਹੁਤ ਹੁਸ਼ਿਆਰੀ ਨਾਲ ਰੌਣਾ ਪਾਈ ਜਾਂਦੇ ਸਬਦ ਗੁਰੂ ਸਬਦ ਗੁਰੂ ਸਬਦ ਗੁਰੂ ਡਰਾਮਾ ਕਰਦੇ ਨੇ ਡਰਾਮਾ ਰੌਣਾ ਨਾ ਪਾਤਾ ਕਿ ਕੋਈ ਸੁਣੇਗਾ ਕਿ ਤੈਨੂੰ ਸਮਝ ਆਵੇ ਇਹ ਗੱਲ ਕੀ ਹੈ ਜੇ ਇਹਨਾਂ ਨੂੰ ਸਿੱਖੀ ਦਾ ਫਕਰ ਹੋਵੇ ਬੜੀ ਦਾਣਾ ਕੋਲ ਵੀ ਐ ਤੇ ਗੁਰੂ ਨਾਲ ਕਿਉਂ ਨਾ ਜੋੜ ਉਤਾਰਾਂ ਤੇ ਆਪਣੀ ਤਾਲ ਨਿਰਾਕਾਰ ਨਾਲ ਕਿਉਂ ਨਾ ਜੋੜਨ ਖੰਭੇ ਨਾਲ ਤਾਂ ਜੋੜਨ ਦਸ ਪਾਸ਼ਰੇ ਕਹਿੰਦੀ ਜੋ ਮੋਕੋ ਪਰਮੇਸ਼ਰ ਉਚਰਾਏ ਤੇ ਸਭ ਦਰ ਘਟਵੇ ਪਰ ਮੈਂ ਹੂ ਪਰੰਪਰਕ ਦਾਸਾ ਦੇ ਖਾਇਓ ਜਗਤ ਤੋਂ ਸੋ ਹੋਰ ਕੀ ਕਹਿੰਦੇ ਬਈ ਇਤੋ ਜਿਆਦਾ ਪਰ ਇਹ ਕਹਿੰਦਾ ਨਰਕ ਕੋਠੇ ਜੀ ਆਣਾ ਮਨਜੂਰ ਹੈ ਪਰ ਤਾਰਾ ਖਪੇ ਨਾਲੇ ਰਖੜੀ ਨੂੰ ਜੋੜ ਕੇ ਨਰਕ ਕੋਠੇ ਜਿੰਦੇ ਕਹਾਂ ਮਨਜੂਰ ਹੈ ਦਸਮ ਪਾਸ਼ਾ ਪਰਮਪੁਰਖ ਸਾਡੇ ਖਾਤਰ ਦਾਸ ਨਹੀਂ ਹੋਏਗਾ ਮਿੱਥੇ ਬਾਕੀ ਗੁਰਦਾ ਕਹਿਣਾ ਰਬੀਏ ਜੇ ਮੈਂ ਕੋਈ ਝੂਠ ਨਹੀਂ ਬੋਲਿਆ ਆ ਮੈਂ ਨਾ ਚੈਨਲ ਵਿੱਚ ਆ ਪਾਕੀ ਪਾੜ ਬ੍ਰਹਮਾ ਗੁਰਨਾਨਕ ਦੀ ਸੁਗਾਤ ਹੈ ਮੈਨੂੰ ਮੈਂ ਕੁਝ ਵੀ ਬਥਿਆਰੀ ਕਹੀ ਗੱਲ ਉਹ ਕਹਿੰਦੇ ਅਸੀਂ ਨਹੀਂ ਬੋਲਦੇ ਇਹ ਗੱਲ ਖੱਬੇ ਨਾਲ ਜੋੜੀਏ ਦਾਰ ਫਿਰ ਨਾ ਡੁੱਬਣ ਫਿਰ ਨਾ ਡੁੱਬਣ ਕਿਉਂ ਨਾ ਡੁੱਬਣ ਕਿਉਂ ਨਾ ਡੁੱਬਣ ਆਰਮੀ ਤੇ ਜਿਹੜਾ ਟੇਕ ਕਰਦਾ ਹੈ ਮਾਲਕ ਦਾ ਟੇਕ ਰੱਖਦਾ ਹੈ ਕੀ ਟੇਕ ਬਰਤੀ ਸਭ ਜਾਣਦੇ ਦੇਵੜ ਕੋ ਇੱਕ ਹੈ ਭਗਵਾਨ ਅਰਦਾਸ ਜਿਹੜੀ ਹੋ ਰਹੀ ਹੈ ਅਰਦਾਸ ਹੋ ਰਹੀ ਹੈ ਜਿਹੜੀ ਸਰਬੰਦਰ ਸਾਹਿਬ ਤੇ ਉੱਤੇ ਗੁਰੂ ਰਾਮਦਾਸ ਨੂੰ ਸੰਬੋਧਨ ਕਰਕੇ ਅਰਦਾਸ ਹੋ ਰਹੀ ਹੈ ਪਰਮੇਸ਼ਰ ਛੱਡ ਦਿੱਤਾ ਗੁਰੂ ਛੜਤਾ ਸਤੋਰ ਫੜ ਲਿਆ ਸਤਗੁਰੂ ਨੂੰ ਗੁਰੂ ਬਣਾ ਕੇ ਅਰਦਾਸ ਕਰਦੇ ਦਰਗਾਹ ਛੜਤਾ ਸ਼ਬਦ ਨਾਲ ਸੁਰਤ ਜੋੜ ਲਈ ਵਿਆਹ ਜਿਹੜਾ ਉਪਦੇਸ਼ ਕੀਤਾ ਸੀ ਉਹਨਾਂ ਨੇ ਸ਼ਬਦ ਇਹਦੇ ਨਾਲ ਜੋੜ ਲਈ ਵਿਆਹ ਖੰਭੇ ਨਾਲ ਜੋੜ ਲਿਆ ਇਹਨਾਂ ਨੂੰ ਪ੍ਰੇਸ਼ ਕਰਨ ਵਾਲੇ ਨਾਲ ਜੋੜ ਗਏ ਸਰੀਰ ਨਾਲ ਜੋੜ ਲਿਆ ਕਰਨ ਵਾਲੇ ਨਾਲ ਆਪਣੀ ਜੋੜੇ ਕਰਦਾ ਤਾਂ ਦਰਗਾਹ ਸੀ ਉਪਦੇਸ਼ ਬੋਲਦਾ ਤਾਂ ਦਰਗਾਹ ਸੀ ਜੀਵਨ ਨਾਲ ਜੋੜਦੇ ਫੇਰ ਤਾਂ ਗੱਲੇ ਕੁਝ ਨਹੀਂ ਸੀ ਸਾਫਾ ਦੀ ਬਜਾਏ ਫਿਰ ਵੀ ਨਾ ਜੋੜ ਲਈ ਉਤਾਰੋ ਜਗਾ ਨੇ ਫਿਰ ਵੀ ਬਾਰੀ ਸਾਫ ਨਹੀਂ ਬਾਰੇ ਕੀ ਫਾਇਦਾ ਥੀ ਉਹ ਬਲ ਕਹਿਣ ਦਾ ਸਰੀਰ ਤਾਂ ਫਿਰ ਹੈ ਜੇ ਉਹਦੇ ਚੇਤਨਾ ਨਾਲ ਵੀ ਜੋੜਦੇ ਬੁੱਧ ਨਾਲ ਵੀ ਜੋੜਦੇ ਨਾਰ ਕਦੀ ਬੁੱਧੀ ਨਾਲ ਜੁੜਦੀ ਬੁੱਧੀ ਹੁੰਦੈਰੇ ਉਹੇ ਜਾਈ ਹੋ ਗਿਆ ਡਾਕਟਰ ਡਾਕਟਰ ਨੂੰ ਗੁਰੂ ਧਾਰਨ ਕਰਦਾ ਡਾਕਟਰ ਬਣ ਜਾਂਦਾ ਸਿੱਖਿਆ ਲੈ ਕੇ ਉਹੇ ਜਾਈ ਬਣ ਜਾਂਦਾ ਜਿੱਦਿਓ ਨਾ ਜੇ ਲਗਨ ਹੁੰਦੀ ਹੈ ਜਿੱਦਿਓ ਮਿਹਨਤ ਕਰਦੇ ਜੇ ਉਹਦੀ ਬੁੱਧੀ ਜੈ ਜੀ ਹੋਵੇ ਉਹੇ ਜੀ ਮੁਕਾਬਲੇ ਦੀ ਉਹੇ ਜਾਈ ਹੋ ਜਾਂਦਾ ਪਰ ਉਹਦੇ ਸਰੀਰ ਨਾਲ ਜੁੜਦਾ ਲੱਗਦਾ ਸਰੀਰ ਦਾ ਉਹ ਮਨ ਕੀ ਝੜੂਗਾ ਉਹਦੇ ਬੁੱਧੀ ਨਾਲ ਅਕਲ ਨਾਲ ਝੋਟਦਾ ਅਕਲ ਨਾਲ ਈ ਹੋਤੇ ਜੇ ਇੱਕ ਡਾਟਰ 6 ਫੁੱਟ ਦਾ ਕਿ 4 ਫੁੱਟ ਦਾ ਤਾਂ ਉਹ ਤਾਂ ਫੁੱਟ ਦਾ ਹੋਣਾ ਜ਼ਰੂਰੀ ਨਹੀਂ ਵੀ ਉਹ ਜਿਹਾ ਹੋਊਗਾ ਕਿ 4 ਫੁੱਟ ਦਾ ਡਾਕਟਰ ਹੈ ਕਿ 6 ਫੁੱਟ ਦਾ ਤਾਂ ਇਹ ਹੋਇਆ ਵੀ 6 ਫੁੱਟ ਦਾ ਜੇ ਨਾ ਹੁੰਦਾ ਨਹੀਂ ਉਹ ਹੋ ਨਹੀਂ ਸਕਦਾ ਇਹ ਕਿੱਥੇ ਲਿਖਿਆ ਅਕਲ ਹੋਣੀ ਚਾਹੀਦੀ ਹੈ ਬਰਾਬਰ ਨਹੀਂ ਇਹ ਕੀ ਹੈ ਜੇਕ ਕਾਲੇ ਕ ਹੋ ਰਹਾ ਹੋਵੇ ਉਹਦਾ ਕੀ ਫਰਕ ਹੈ ਇਹਨਾਂ ਨੂੰ ਇਨੀ ਤਬੀਜ ਨਹੀਂ ਹੈ ਇੰਨੀ ਸਭੀ ਨੂੰ ਸਿੱਖੀ ਦਾ ਪ੍ਰਚਾਰ ਕੀ ਕਰਦੇ ਹੋ ਇਹਨਾਂ ਦੇ ਕੋਲ ਖਾਲਾ ਤੋਂ ਆਇਆ ਸੀ ਪ੍ਰਚਾਰ ਅਸਲ ਵਿੱਚ ਜੋ ਪ੍ਰਚਾਰ ਚੱਲਿਆ ਸਾਲਾ ਦੇ ਜੋ ਚਲਾਤਾ ਉਹੀ ਚੱਲ ਰਿਹਾ ਇਹਨਾਂ ਨੂੰ ਲੋੜ ਨਹੀਂ ਹੈ ਪ੍ਰਚਾਰ हो। ਉਹ ने जो ਜੋ चलाया ਚਲਾਇਆ ਸੀ ਹਿੰਦੂ ਵਤਣਾ ਉਹ ਹੀ ਚੱਲਦਾ ਹੈ ਪ੍ਰਚਾਰ ਨਹੀਂ ਬਦਲ ਰਿਹਾ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨਗੋਰੇ ਕਾਹਨ ਨਾਉ ਬੁਰਾ ਇਹ ਕਾਰਨ ਹੈ ਕਿ ਇੰਨੇ ਫਿਰਕੇ ਪੈਦਾ ਹੋ पैदा हो ਚ ਸੱਚ ਦਾ ਬਹੁਤ ਹੀ ਬ੍ਰੇਕ ਲਕੀਰ ਆ ਖੱਡੇਉ ਤਿੱਖੀ ਬਾਲਾਂ ਨਿੱਕੀ ਬਾਲਾਂ ਨਿੱਕੀ ਲੈ ਜੇ ਵੀ ਦੂਈ ਲੈ ਕੇ ਕੱਢੇਂ ਤਾਂ ਤੁਸੀਂ ਕਦੇ ਕੱਢੋਗੇ ਖੱਡੇ ਦੀ ਧਾਰ ਐ ਧਾਰ ਦੇ ਦੂਈ ਤਾਰੇ ਕੋ ਰਹੂਗੀ ਦੂਈ ਬਣਾ ਕੇ ਦਿਖਾਓ ਇਹਨਾਂ ਨੇ ਗਾਢੀਰਾ ਬਣਾ ਲਿਆ ਜਾਂ ਗਾਢੀਰਾ ਬਣਾ ਲਓ ਤੇ ਤਾਂ 500 ਤਾਰ ਬਣਾ ਲਓ ਵੇਖ ਬ੍ਰੇਕ ਬ੍ਰੇਕ ਲੈਣਾ ਖਿਚਲੋ ਕਿ ਆ ਗਾਢੀਰਾ ਬਣਾ ਲਿਆ ਉਹਦਾ ਟੱਟ ਫੁੱਟ ਜਗਾ ਉਸਦੀ ਅਬਜਾਲੇ ਉਹਦੇ ਸਾਢੇ ਤਰ੍ਹਾਂ ਇੱਕ ਪਈਆ ਇਧਰ ਆਇਆ ਇੱਕ ਇਧਰ ਆ ਪਹਿਲਾਂ ਤਾਂ ਲੈਣਾ ਦੋ ਤਾਂ ਇਹੀ ਹੋ ਗਈ ਦੋ ਦੋ ਤਾਂ ਲੈਣਾ ਇਹੀ ਹੋ ਗਈ ਵਿਚਾਲੇ ਬਰੀਕ ਬਰੀਕ ਜਿੰਨੀ ਵਾਰਗੀ ਗੜ ਲੱਕ ਪਈਆ ਦੇ ਵਿਚੇ ਚਾਹੀਦਾ ਸੱਟ ਲਓ ਐਡੀ ਜੋੜੀ ਲੈ ਦੁੱਦੀ ਉਹਦੀ 4 ਸਾਢੇ 4 ਇੰਚ ਦੀ ਲੈਣੀ ਹੁੰਦੀ ਆ ਹਾਂ ਗੁਰੂ ਕਾਢੇਰਾ ਬਣਾਤਰ ਉਹਦਾ ਹਿੰਦੂਜੀ ਕੋਈ ਜਿਹਦੇ ਵਾਰਾ ਲਿਖਿਆ ਨਾ ਕਰਦਾ ਉਹ ਹਿੰਦੂਵਾਦ ਪ੍ਰਚਾਰਕ ਇਹਨਾਂ ਪਰ ਪਰਚਾਰ ਇਹਦਾ ਕਰਦੇ ਨੇ ਸਾਰੇ ਜੀ ਜੋ ਸਾਧਨਾ ਰਹਿਣਾ ਗੁਰਬਾਣੀ ਤਾਂ ਛੱਡ ਗਏ ਗੁਰਬਾਣੀ ਫੇਰ ਵੀ ਆ ਜਾਂਦਾ ਕਿ ਤੋ ਕਿਤੋਂ ਇਹਨਾਂ ਦੇ ਖਰਾ ਹੋ ਉਹਨਾਂ ਨੂੰ ਛੱਡੇ ਲੋ ਕਿਤੋਂ ਕਿਤੋਂ ਅਸੀ ਗੱਲ ਆ ਜਾਂਦੀ ਹੈ ਗੁਰਬਾਣੀ ਦੇ ਵਿੱਚ ਤਾਂ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਜਿਵੇਂ ਪੱਟੀ ਹੋਈ ਪੱਟੀ ਤਾਂ ਪੱਟੀ ਪੋਚੀ ਪਈਆਂ ਇਹਨਾਂ ਦੀ ਸਾਰਿਆਂ ਦੀ येदा बिल्कुल पहली पट्टी पहुंच के तू लिखी है मेरे पटिया लिखने श्री गोपाल श्री गोपाल लिखे तो और कह रहे तू मेरी पटिया लिख दे श्री गोपाल गुरु साहब ने पटिया दे श्री गोपाल ने लिखया औरा दी लिखी पहुंच के तू ही लिखी है अपनी लिखी असली गुरु साहब दी पहली पट्टी ठीक है उधर वो पहुंच के तू लिखी है ਅਪਰਵਿਚਰ ਨਹੀਂ ਲਿਖੀ ਆਪਰੇ ਲਿਖੀ ਰਹੇ ਅਪੜਦਾ लिखाई ਹਾਈ ਉਹਨੇ ਲਿਖੀ ਰਹੇ ਜੇ ਫਰਮਾਇ ਤਵੇ ਪਾਇਆ ਖਰਤਾ ਉਹੀ ਪਾਇਆ ਜਿਹੜਾ ਫਰਮਾਇਆ ਨੇ ਉਹਦੇ ਸਤਗੁਰ ਬਾਝੋਂ ਗੁਰ ਨਹੀਂ ਕੋਈ ਨਗੂਰੇ ਕਾਹ ਨਾਮ ਬੁਰਾ ਸਤਪੁਰ ਤੇ ਬਿਨਾ ਗੁਰ ਕੋਈ ਨਹੀਂ ਹੈ ਸਤਗੁਰ ਤੋਂ ਬਿਨਾ ਕੋਈ ਗਿਆਨ ਨਹੀਂ ਹੈ ਕੋਈ ਗਿਆਨ ਸੰਸਾਰ ਦੇ ਵਿੱਚ ਸਤਗੁਰ ਦੇ ਗਿਆਨ ਤੋਂ ਗੁਰਮਤਿ ਦੇ ਬਰਾਬਰ ਦਾ ਕੋਈ ਗਿਆਨ ਨਹੀਂ ਹੈ ਸੁਸਾਚ। ਇਹੀ ਗੋਰਾ ਗੁਰਬੇਰਾ ਗਿਆਨ ਗੁਰਦੇ ਦੇ ਧਿਆਨ ਜਿਹੜਾ ਹਿਰਦੇ 'ਚ ਧਿਆਨ ਟਿਕਾਉਣ ਵਾਲਾ ਗਿਆਨ ਹੈ ਉਹ ਇਹੀ ਹੈ। ਬਾਕੀ ਗਿਆਨ ਸਭ ਤੋਂ ਬਾਹਰ ਜੋੜਨਗੇ। ਬਾਕੀ ਸਭ ਗਿਆਨ ਬਾਹਰ ਜੋੜਨਗੇ। ਅੰਦਰ ਦੀ ਖੋਜ ਵਾਲਾ, ਅੰਦਰ ਦੇ ਟਿਕਾਉਣ ਵਾਲਾ, ਵਿੱਚ ਘੜ ਕੇ ਪਚਾਉਣ ਵਾਲਾ ਗਿਆਨ ਇਹੀ ਹੈ। ਅੰਦਰ ਚਾਨਣ ਕਰਨ ਵਾਲਾ ਗਿਆਨ ਇਹੀ ਹੈ। ਹੋਰ ਕੋਈ ਗੱਲ ਨਹੀਂ। ਸਤਗੁਰ ਬਾਝੋ ਗੁਰ ਨਹੀਂ ਕੋਈ। ਗੁਰ ਨਹੀਂ ਕੋਈ ਬਾਹਰ ਕੋਈ ਨੀ ਨਗੁਰੇ ਕਾਹ ਨੋਂ ਬੁਰਾ। ਜਿਹੜਾ ਨਗੁਰਾ ਹੈ ਸਤਗੁਰ ਤੇ ਗਿਆਨ ਤੋਂ ਖਾਲੀ ਸਖਣ। ਉਹਦਾ ਜਿਹੜਾ ਨਾਂ ਆ ਉਹਦਾ ਜਿਹੜਾ ਗਿਆਨ ਹੈ ਨਾ। ਨਾਮ ਦਾ ਅਰਥ ਗਿਆਨ ਵੀ ਗਿਆਨ ਹੀ ਹੁੰਦਾ। ਉਹਦਾ ਗਿਆਨਤਾ ਬੁਰਾ ਹੈ। ਜੇ ਨੌਂ ਦਾ ਅਰਥ ਜਸ ਕਰ ਲਈਏ ਤਾਂ ਵੀ ਬੁਰਾ ਦੁਰਮਤ ਹੈ ਜਿਹੜੀ ਉਹਦਾ ਗਿਆਨ ਵੀ ਬੁਰਾ ਹੈ ਉਹਦਾ ਜਸ ਵੀ ਬੁਰਾ ਹੈ ਕਬੀਰ ਕੀ ਕਹਿੰਦਾ ਪਹਿਲੀ ਕੂਪ ਕੁजात ਕੁਲਖੜੀ ਸੋਹਰੇ ਪਈਏ ਬੁਰੀ ਜਿਹੜੀ ਮੇਰੀ ਪਹਿਲੀ ਬਤ ਸੀ ਓਹ ਕੂਪ ਸੀ ਕੁजात ਸੀ ਕੁਲਖੜੀ ਸੀ ਬੁਰੇ ਲਖਣ ਸੀ ਕੁजात ਸੀ ਜਾਤ ਵੀ ਚੰਗੀ ਰਹੀ ਸੀ ਸਰੀਰ ਤੂੰ ਜਾਤ ਬੁੱਧੀ ਸੀ ਪਜਾਤ ਪਾਤ ਨੂੰ ਬੁੱਧੀ ਸੀ ਦਿਰਾਕਾਰੀ ਜਾਤ ਦੀ ਸਮਝ ਰਹੀ ਸੀ ਸਰੀਰ ਦੀ ਸਮਝ ਨਹੀਂ ਸੀ ਕ੍ਰੂਪ ਸੀ ਰੂਪ ਵੀ ਠੀਕ ਨਹੀਂ ਸੀ ਸਾਰੇ ਪਈਏ ਬੁਰੀ ਸਾਰੇ ਪਈਏ ਬੁਰੀ ਨਾਲੇ ਆਹ ਲੋਕ ਜਗ ਬਰਾ ਮੰਦਰ ਲੋਕ ਨੂੰ ਨਾਲੇ ਪਰਲੋਕ ਜ ਬੁਰੀ ਬੋਲਦੇ ਇਸ ਕਰਕੇ ਸਤਗੁਰ ਬਾਝੋ ਗੁਰਬੇ ਕੋਈ ਨਗੁਰੇ ਕਾ ਹਣੋਂਦੋ ਬੁਰਾ ਜਿਹੜਾ ਨਗੁਰਾ ਸਤਗੁਰ ਤੋਂ ਨੂੰ ਉਪਦੇਸ਼ ਲਈ ਜਿਹੜੇ ਲੈ ਆ ਨਾ ਸੱਚ ਦਾ ਉਪਦੇਸ਼ੀ ਦੇ ਕੋਲ ਨਹੀਂ ਹੈ ਉਹਦਾ ਜਸ ਵੀ ਬੁਰਾ ਹੈ ਉਹਦਾ ਗਿਆਨ ਵੀ ਬੁਰਾ ਜੋ ਉਹਨੇ ਜਸ ਕੀਤਾ ਜਿਹਦਾ ਕੀਤਾ ਉਹਨੇ ਤਾਂ ਬੰਦੇ ਦਾ ਜਸ ਕੀਤਾ ਉਹਨੇ ਕ੍ਰਿਸ਼ਨ ਦਾ ਜਸ ਕੀਤਾ ਉਹਨੇ ਉਹਦੇ ਸਰੀਰ ਦਾ ਜਸ ਕੀਤਾ ਉਹਨੇ ਵਿਸ਼ਨੂ ਦਾ ਜਸ ਕੀਤਾ ਔਰ ਉਹਦੇ ਘਰ ਚ ਦਾ ਜਸ ਕੀਤਾ ਉਹਨੇ ਉਹਦੇ ਧੰਗ ਦਾ ਜਸ ਕੀਤਾ ਉਹਦੇ ਸਰੀਰ ਦੇ ਪਾਇਆ ਉਹ ਸਾਰਾ ਮਾਇਆ ਦਾ ਹੀ ਜਸ ਹੈ ਕੁਝ ਕੀ ਅਕਾਉਂਟ ਵੱਡਾ ਮਾਇਆ ਵੜਿਆ। ਪਰ ਮਾਇਆ ਨੂੰ ਦੇ ਕੇ ਬੜਾਈ ਕੀਤੀ ਹੈ। ਇੱਥੇ ਕੌਣ ਵੱਡਾ ਜਨ ਹੱਲੇ ਬਲਾਈ? ਸਤਗੁਰੂ ਨੂੰ ਵੱਡਾ ਕਿਉਂ ਕਿਹਾ? ਸਤਗੁਰੂ ਤੇ ਹੱਲੇ ਹੋਈ ਹੈ। ਸਤਗੁਰੂ ਬਾਜੋ ਗੁਰ ਨੇ ਜਿਹੜੇ ਹੋਰ ਗੁਰੂ ਬਣੇ ਫਿਰਦੇ ਨੇ ਉਹਨਾਂ ਦਾ ਗਿਆਨ ਵੀ ਬੁਰਾ ਉਹਨਾਂ ਦਾ ਜਸ ਜੇ ਤੁਸੀਂ ਉਹਨਾਂ ਦਾ ਜਾਸਾ ਉਹ ਵੀ ਬੁਰਾ ਹੈ ਇੱਥੇ ਵੀ ਬੁਰਾ ਹੈ ਦਰਗਾਹ ਜੋ ਨਾਲ ਜਾਸ ਨਹੀਂ ਹੈ ਉੱਤੇ ਤਾਂ ਉਹ ਪੁੱਛਾਈ ਕੋਈ ਨਹੀਂ ਜੇ ਜੋ ਵਿਚਾਰੇ ਅਰਜਾ ਹੋਰ ਦਸੂਣੀ ਹੋਏ ਦਵਾ ਖੰਡਾ ਵਿਚਾਰੀਏ ਨਾੜ ਚੱਲਦਾ ਸਭ ਕੋਏ ਚੱਕਾ ਨੌਰ ਖਾਏ ਕੇ ਜਾਸ ਕੀ ਇਰਤਜਾਦ ਲੈ ਜੇ ਤਿਸ ਦਾ ਨਾਮ ਵੀ ਬਾਤ ਨੂੰ ਪੁਛੇ ਕੇ ਉਹਨਾਂ ਨੂੰ ਕੌਣ ਪੁੱਛਦਾ ਸੰਸਾਰ ਜਿੱਦੀ ਜਿੱਦੀ ਵਰਜੀ ਇੱਜ਼ਤ ਹੋਵੇ ਉਹਦੀ ਗੁਰਗਾ ਜੋ ਦਾ ਜਸ ਰਹੀ ਹੈ ਚਲਦਾ। ਵਰਗ ਖੋਟਾ ਹੋ। ਇੱਥੇ ਵੀ ਖੋਟਾ ਸਾਬਤ ਹੋ ਜਾਂਦਾ ਬਾਅਦ ਦੇ ਵਿੱਚ। ਉਹਨੇ ਘਰ ਵਿੱਚ ਆਏ ਔਰ ਖਰਾਬ ਖਤਮ ਹੋ ਗਿਆ। ਉਹਦੇ ਨਾਲ ਬਤਾਈ ਖਤਮ ਹੋ ਗਿਆ। ਲੋਕ ਇਹਦੇ ਸਿਆਣੇ ਹੋ ਗਏ। ਕਿ ਉਹਨਾਂ ਨੇ ਰਿਜੈਕਟ ਕਰਦੇ ਹੋ ਬੰਤੋ। ਇਸਾਈ ਮਤ ਫੈਲੀ। ਇਸਾਈਆਂ ਨੇ ਰਿਜੈਕਟ ਕਰਤੀ। ਬਾਈਬਲ ਖੁਰਬੀ ਰਜਤੇ ਕੁਰਾਨ ਅੱਜ ਦੇ ਜਮਾਨੇ ਚ ਕੁਰਾਨ ਦੇ ਖਰਾਬ ਵੀ ਲੋਕ ਬੋਲਣ ਕਬ ਕੁਰਾਨ ਤਾਂ ਵੈਸੇ ਆਦਮੀ ਨੂੰ ਚੰਗਾ ਕੰਮ ਕਰਦੀ ਉਹ ਗੱਲ ਕਰਦੀ ਹੈ ਕੁਰਾਨ ਦੇ ਵਿੱਚ ਆ ਆ ਗੱਲ ਨਹੀਂ ਹੈ ਉਹ ਕਹਿੰਦਾ ਵੀ ਤੁਸੀਂ ਠੀਕ ਕੰਮ ਨਹੀਂ ਕੀਤਾ ਜਿਵੇਂ ਪਰਮੇਸ਼ਰ ਨੇ ਕਿਹਾ ਸੀ ਤੁਹਾਨੂੰ ਨੇਕ ਬਣੋ ਦੇ ਦਾ ਆਦੇਸ਼ ਦਿੱਤੀ 2000 ਦਾ ਟੈਕਲ ਇਹੀ